ਚਾਰ ਪਦਾਰਥ ਚਾਰ ਪਦਾਰਥ ਜੇ ਆਪਾਂ ਗੁਰਦਾ ਜੀ ਕੋ ਮੰਗੇ ਸਾਧ ਜਨ ਕੀ ਚਾਰ ਪਦਾਰਥ ਸਮਝਣ ਹੁਣ ਮੇਰਾ ਦੇਖਾਰਾ ਕਿ ਸਾਨੂੰ ਪਤਾ ਹੀ ਨਹੀਂ ਚਾਰ ਪਦਾਰਥਾਂ ਦਾ ਕੋਈ ਗੱਲੇ ਦੀ ਗੱਲ ਦਾ ਸੰਤ ਉਹ ਤਾਂ ਨਾਮ ਦੀ ਗੱਲ ਕਰਦੇ ਚਾਰ ਪਦਾਰਥ ਮਿਲਣਾ ਹੀ ਨਾ ਮਿਲਣਾ ਚਾਰ ਪਦਾਰਥਾਂ 'ਚ ਚੌਥਾ ਪਦਾਰਥ ਬਰੋਗ ਆਖਰੀ ਕਿਸੇ ਪਦਾਰਥ ਤੋਂ ਪਹਿਲਾਂ ਮਿਲਦੇ ਇਸ ਅਵਿਸ਼ਵਾਸ ਨੂੰ ਕਹਿੰਦੇ ਹਾਂ ਮਾਇਆ ਦੇ ਅੰਦਰ ਅੰਦਰ ਚੌਥਾ ਪਦਾਰਥ ਮੁਜ਼ਕਾ ਤੋਂ ਦਰਗਾਹ ਹੋ ਮਾਇਆ ਤੋਂ ਪਰੇ ਮਾਇਆ ਤੇ ਰੈਗੁਣੀ ਮਾਇਆ ਦੇ ਕਿੰਨੇ ਗੁਣਾ ਤਾਂ ਛੁੱਟਦੇ ਨੇ ਸੱਤ ਪਦਾਰਥਾਂ ਨਾਲੇ ਛੁੱਟੇ ਸੱਤ ਦੇ ਸੁਭਿਤੀ ਦਵਾਈ ਆਲੋ ਸੱਤ ਕਸਮ ਦੀ ਦਵਾਈ ਹੈ ਸੱਤ ਦੇ ਸਤਾ ਹੀ ਰੋਗ ਹੈ ਸੱਤ ਕਸਮ ਤੇ ਤਾਂ ਬੜੀ ਤਾਪਟਿਆ ਜਿਹੜੇ ਤਾਪੜਾ ਨੂੰ ਹਰਾ ਜਿਹੜੇ ਤਿੰਨ ਤਾਪ ਦੇ ਕਦੇ ਨ ਜਾਣ ਜਪਣਾ ਇਹ ਦੱਸੋ ਤੇ ਤੁਸੀਂ ਸਮਝਦੇ ਇਹੋ ਕੋਣੋ ਬਿਮਾਰੀਆਂ ਤਾਂ ਪ੍ਰਕਾਰ ਦੀ ਸਮਝ ਲਓ ਦਮਾ ਵੀ ਹੈਗਾ ਕੈਂਸਰ ਵੀ ਹੈਗਾ ਇਕੱਲਾ ਕੋਈ ਹੋਰ ਕਰ ਲੋ ਜਿਹੜਾ ਰੋਗ ਅੱਲਾ ਉਸੇ ਤੇ ਹੋਵੇ ਕੁੜ ਅਲੱਗ ਅਲੱਗ ਦਵਾਈ ਜੇ ਲੂਤਣਾ ਤੇ ਕੋਈ ਸੁਣਦੇ ਨਹੀਂ। ਉਹ ਇਹ ਡਾਕਟਰ ਦੀ ਮਰਜ਼ੀ ਆ ਵੀ ਪਹਿਲਾਂ ਕਿਹੜੀ ਹਟੋਣੀ। ਜੋ ਫੁੱਟ ਪਤਾ ਵੀ ਪਹਿਲਾਂ ਭਈਆ ਹਟੂਗੀ। ਜੇ ਤਾਂ ਰੋਗ ਪੈਦਾ ਹੋਇਆ ਉਹ ਸਭ ਤੋਂ ਪਿੱਛੋਂ ਹਟੂ। ਇੱਕ ਰੋਗ ਤੋਂ ਹੋਰ ਰੋਗ ਪੈਦਾ ਹੋ ਜਾਂਦੇ ਨੇ। ਜਿਹੜੇ ਪੈਦਾ ਹੋ ਜਾਂਦੇ ਨੇ ਹੋਰ ਰੋਗ। ਸਭ ਤੋਂ ਬਾਅਦ ਉਹ ਰੋਗ ਦੀ ਵਾਰੀ ਆਉਂਦੀ ਹੈ। ਉਹ ਪ੍ਰਾਣਾਂ ਦਾ। ਜਿਵੇਂ ਜੜ ਰੜ੍ਹਤੀ ਪੈਦਾ ਹੁੰਦੀ ਹੈ ਪਹਿਲਾਂ। ਪਹਿਲਾਂ ਦੇਣ ਗੜ ਅੰਦਰ ਜੱਬੇ ਤਾਂ ਉੱਪਰ ਹੋਵੇ ਸ਼ੌਕ। ਜਦ ਤੱਕ ਸੁੱਕਾਂ ਲੱਗਦਾ ਪੱਤੇ ਸਭ ਤੋਂ ਪਹਿਲਾਂ ਸੁੱਕਦੇ ਨੇ। ਕਿਹੜੇ ਘੜਾੜੇ। ਉਸੇ ਦਾਸ ਦੇ ਫਿਰ ਬਰੀਕ ਚਾਂਦੀਆਂ। ਫਿਰ ਉਹ ਤੋਂ ਫੋਟੇ ਫਿਰ ਉਹ ਮੂਰੇ ਗੇਲੀ ਦੀ ਕਹਿੰਦੀ ਉਹ ਤਾਂ ਸਾਰਿਆਂ ਤੋਂ ਪਿੱਛੇ ਜਾੜੋ ਜੜ ਫਿਰ ਕਿਉਂ ਜੜ ਜੂਈ ਕਿਉਂਦੀ ਆ ਜੜ ਫਿਰ ਵੀ ਗਿੱਲੀ ਰਹਦੀ ਹੈ ਜੜਾ ਜੜ ਜਾਈ ਜਾਣਾ ਅਸਲ ਜੜਾ ਹੈ ਜਿਹੜੀ ਰੋਗਾਂ ਦੀ ਉਹ ਸਭ ਤੋਂ ਬਾਅਦ ਹੀ ਜਾਣੀ ਜੀ ਤਿੰਨ ਪਦਾਰਥ ਦੇ ਸੋਣਨਾ ਸਭ ਤੋਂ ਪਹਿਲਾਂ ਗਿਆਨ ਪਦਾਰਥਾ ਗੁਰਬਾਣੀ ਦੁਆਰਾ ਲੱਭਦਾ। ਇਹ ਗਿਆਨ ਪਦਾਰਥ ਹੈ। ਗੁਰ ਗਿਆਨ ਪਦਾਰਥ ਨਾਮ ਹੈ। ਇਹ ਵੀ ਇਹੋ ਹੀ ਨਾਮ ਹੈ ਕਹਿ ਦਿਆਂ ਸੀ। ਪਰ ਜਿਹੜਾ ਗੁਰਬਾਣੀ ਦਾ ਗਿਆਨ ਖੁਦਾ ਆਸ਼ਾ ਇਹਦੇ ਨਾਲ ਤਾਂ ਸ਼ੁਰੂ ਹੋਣਾ। ਕਦੋਂ ਇਹਨਾ ਪਹਿਲਾਂ ਇਹਨਾ ਤੇਜ ਬੁਖਾਰ ਦਾ ਨਾ ਤੇਜ। ਸਭ ਤੋਂ ਤੇਜ ਬੁਖਾਰ ਤ੍ਰਿਸ਼ਨਾ ਹੋਗਾ। ਤ੍ਰਿਸ਼ਨਾ ਨਾ ਆਇਆ ਦੀ। ਬੇਸ਼ੁੜਕੇ ਲੱਗੀ ਤ੍ਰਿਸ਼ਨਾ। ਇਹ ਬਹੁਤ ਤੇਜ਼ ਬੁਖਾਰ ਤੇਰੀ ਸ਼ਰਾਂ ਦੀ ਹਾਜ਼ਰੀ ਵਿੱਚ ਕੋਈ ਹੋਰ ਰੋਗ ਹਟਦਾ ਨਹੀਂ ਜੀ ਚਾਹ ਪਰ ਇਹ ਤਾਂ ਜਦੋਂ ਤੋਂ ਸਦੇ ਉਦੀ ਹੋਈ ਨਹੀਂ ਰਾਮਗੜੀ ਜੀ ਦਾ ਆਵੇ ਜਦੋਂ ਹੀ ਨਹੀਂ ਹੁੰਦੀ ਟੈਂਪਰੇਚਰ ਉਹ ਤੇ ਜਿਆਦਾ ਤਾਂ ਹੋ ਜਾਂਦੀ ਹੈ ਦੋਸਤ ਸਦੇ ਉਦੀ ਹੋ ਜੇ ਰੋਣਾ ਚਿੱਟਾ ਕਮਿਆੜ ਰੀਦਾ ਤਾਂ ਥੱਲੇ ਉਹਨਾਂ ਦੀ ਹਿੱਸਾ ਤੋਂ ਤੇ ਡਾਕਟਰ ਦੀ ਕਿੰਨਾ ਢੇ ਤਕਬੀਰ ਬੜੀ ਤੇ ਵੀ ਚੰਗਾ ਸਮਝੇ ਹਤੇ ਪਹਿਲਾ ਟੈਪਰੇਚਰ ਥੱਲੇ ਲੱਗਦੀ ਕੋਈ ਹੈ ਵਿਰੋਧ ਕਰਦਾ ਹੋਏ ਹੈ ਹਮੇ ਨਾਲ ਵਿਰੋਧ ਕਰ ਸੁਕਾਰ ਦਾ ਗਰਾਫ ਨੂੰ ਦਿੱਤਾ ਜਾਂਕਾਰ ਦੇ ਜੜ ਜਾਂਦਾ ਸਿੱਧਾ ਜਾਏ ਬਟੇ ਸੰਭਾਲ ਉਹਨਾਂ ਇਹ ਵੀ ਲੱਗਦਾ ਪਹਿਲਾਂ ਲੱਗਿਆ ਬੰਦੂ ਜੇ ਵੀ ਚੱਲੀ ਤੁਹਾਡੀ ਕਿਥੋਂ ਜਾ ਕੇ ਗੱਲ ਖੜੂ ਕਿਥੋਂ ਕੁੰਦੀ ਗੁਰਬਾਣੀ ਦੇ ਆਤਮਾ ਰਾਜ ਕਰਨਾ ਉਹ ਕਿਵੇਂ ਕਰਦੀ ਹੈ ਉਹ ਐਂ ਕਰਦੀ ਹੈ ਗੁਰਲਾਬ ਦੇ ਤੇ ਉਹ ਕਰ ਸੁਭਰਾਣ ਗੁਰਬਾਣੀ ਦੇ ਵਿੱਚ ਕੌਣ ਬੜਾ ਕੌਣ ਹੈ ਆਪਣੇ ਦਾਸ ਕੋ ਦੇ ਬੜਾਈਏ ਬੜਾਈ ਰਹੇ ਨੇ ਦਾਸ ਮਾਨਾ ਬਊਗਾ ਨਸ਼ਾ ਤਾਂ ਅਰਥਾ ਦਾ ਸੰਤਾਂ ਨੂੰ ਨਸ਼ਾ ਹੈ ਦਾਸ ਨੂੰ ਬੜੇ ਐ ਬੜੇ ਸੰਤ ਨੂੰ ਕਿੱਥੋਂ ਬੜਿਆ ਨਹੀਂ ਦਾਸ ਤੇਰੇ ਕੀ ਬੈਂਤੀ ਸਰੇਦ ਪ੍ਰਗਿਆਸ਼ ਨਾਨਕ ਖੁਦ ਕਹਿ ਰਿਹਾ ਛੱਤ ਬੜੇ ਫੁੱਜਦੇ ਮਹਾਪੁਰਸ਼ ਇਹ ਵੇਗ ਉੱਤੇ ਉਤਰੇ ਨੇ ਰੈ ਉੱਤ ਉਤੋ ਬੋਲਦੇ ਕਾ ਕਿ ਮਾਇਆ ਸੀਅ ਦਰਤਾ ਇਹ ਤਾਂ ਵਾਲੀ ਸੀ ਬਗਲਾ ਸੀ ਇਹ ਅਵਾਜ਼ ਤਾਂ ਆ ਹੀ ਨਹੀਂ ਸੀ ਉਦੋਂ ਉ피 ਸੀ ਲੋਕਾਂ ਨੂੰ ਕੱਪੜੇ ਪਾ ਕੇ ਸਾਥ ਜਰਾ ਤੇ ਦਿਖੋਦਾ ਸੀ ਉਹ ਰਜਮੀ ਵੱਡ ਜਾਂਦਾ ਸੀ ਫਿਰ ਆਪਣੀ ਕੇ ਬੈਠਾ ਰਹਿੰਦਾ ਸੀ ਮਸਤ ਹੋ ਕੇ ਰਜਮੀ ਸੀ بڑے ਉਹਨੂੰ ਕਿ ਚੱਕਰ ਉਹ ਤੇ ਗੱਲਾ ਵੀ ਬੈਠਾ ਜਾਂਦਾ ਬੈਠ ਵੀ ਰਾਜੀ ਗੱਲਾ ਆਪਣੀ ਅਜਾ ਹੀ ਤੇ ਉਹ ਫਿਰ ਕੱਲਾ ਕਿੱਥੇ ਆ ਤਾਂ ਸਾਡੀ ਦੁਨੀਆ ਨਾਲ ਜੁੜਿਆ ਹੋਇਆ ਗੁਰਦਾਬ ਤੇਰੀ ਜਦ ਬੁਰੀ ਕਾਇਮ ਕਰਦਾ ਫਿਰ ਪਤਾ ਲੱਗਦਾ ਵੀ ਇਸ ਬੜਾ ਕੌਣਾ ਹੰਕਾਰ ਉੱਪਰ ਥੱਲੇ ਦਾ ਗੁਰਦਾਬ ਤੇਰੀ ਉੱਤਰ ਸ ਮੈਲ ਬਿਨਸ ਯਾਰ ਹੁੰਦੇ ਜਿਹਦੇ ਨਾਲ ਇੱਕ ਸਦੋ ਬੁਖਾਰ ਤੇ ਥੱਲੇ ਵੀ ਨਿਕਲਦਾ ਫਿਰ ਉਹਦਾ ਘਰਾਬ ਥੱਲੇ ਨੂੰ ਹੋਰ ਲੱਗ ਜਾਂਦਾ ਨਹੀਂ ਹੰਕਾਰ ਹੀ ਕਿਉਂ ਬਦਦਾ ਕਾਜ਼ਾ ਥੋੜਾ ਹੁੰਦਾ ਉਹ ਤਾਂ ਟੈਂਪਰੇਚ ਚੜੀ ਰਹਿਣੀ ਹੈ ਉਹ ਤਾਂ ਉਹਦੀ ਆਪਮਾਨ ਚੜੀ ਜਾਣੀ ਹੈ ਨਾ ਹਾਂਜੀ ਇਹ ਤਾਂ ਚੱਲਿਆ ਪਹਿਲਾ ਗਿਆਨ ਪਦਾਰਥ ਹੈ ਇਹਦਾਂ ਕੀ ਬਿਲਿਆ ਦੂਆ ਪਦਾਰਥ ਦੇਖੋ ਇੱਕੋ ਸਿੱਕੇ ਦੇ ਦੋ ਪੈ ਇਸਕ ਨਾਲ ਦੋ ਦਵਾਈ ਹੈ ਦਵਾਈ ਗਿਆਨ ਦਿੱਤੀ ਹਮਾਰੇ ਕੀ ਹੈ ਜੀ चित्रषा घट उत्तरीषा कटिया कार्य कटयागा भुक्ति बढ़ गई चित्रषा ऐतो ओ अपने 102 तो 150 धोरे ने ना परे चेता वजू को नहीं वजू वजन दी कोई आस नहीं रोज माला फेरना रोज दवाई दने हां ਸਾਬਤ ਜਤਨ ਕਰਦੇ ਆ ਨਾ ਆਪਣੇ ਥੱਲੇ ਆਉਦੀ ਹੋਈ ਓੜੀ ਚਿੱਟਾ ਸੀ ਉਹ ਬੜੀ ਚਿੱਟਾ ਜਾਏ ਬਿਡੇ ਹੱਸਰ ਤੇ ਚਿੱਟਾ ਘੜੀਆ ਤਰਕਾਰ ਬਟ ਗਿਆ ਪਤਾ ਲੱਗ ਗਿਆ ਬਈ ਹੋ ਗਈ ਜਿਨਾ ਜਰ ਬੁਖਾਰ ਆ ਜਤਨ ਕਰੀ ਆ ਤੇ ਜੇ ਚਿੱਟਾ ਅਜੇ ਬੁਖਾਰ ਹੈ ਬੁਖਾਰ ਨਹੀਂ ਹੁੰਦਾ ਠੀਕ ਹੁੰਦਾ ਹੌਸਲਾ ਹੁੰਦਾ ਹਲਕੇ ਸਬੂਖ ਤੇ ਬੁੜ ਗਏ ਉਹ हो गया ਗਿਆ ਨਾ ਤੇ ਟਾਵਾ ਤੋਂ ਤਾਂ ਮੁਕਤ ਹੋਇਆ दो ਦੋ ਹੋ ਰਹੀ ਗੀ ਬਦਾਰ ਦੋ ਰਾਜੇ ਵੀ ਅੰਦਰ ਦੇ ਵਿੱਚ ਹੀ ਆ ਜੋ ਪਰ ਹੁਦਾਨਾ ਦੀ ਭਟਿਆ ਤੇ ਛਿਰੋਪੜੀ ਬਣਿਆ ਆਪਣੇ ਅੰਦਰ ਹੁੰਦੀ ਜਾਂਦਾ ਹੈ ਸੁਲਤੀ ਤੇ ਬਾਹਰ ਉਹਨੇ ਦੀ ਬਾਇਆ ਚੋ ਤਾਂ ਬਾਹਰ ਆ ਗਿਆ ਇਕੱਠਾ ਉਹਦਾ ਸਾਰਾ ਇਕੱਠਾ ਕਰਕੇ ਕੋਈ ਗੱਢਣ ਚਾਹਦੇ। ਇਕੱਠਾ। ਉਹ ਇਹ ਤਾਂ ਛੱਡ ਦੇ ਯਾਰ। ਇਹ ਦੇਸ਼। ਇਹ ਦੇਸ਼ ਤੋਂ ਛੱਡਣ ਨੂੰ ਤਿਆਰ ਬੈਠਾ ਗੱਢੀ ਮੰਨੀ ਹੋਣੀ। ਉਹ ਤਾਂ ਬੰਦੇ ਕਿਹੜਾ ਸੋਣੀ ਚੱਲ ਜਾਵੇ ਕੌਲ, ਉਹ ਕੀ ਆਵੇ ਤਾਂ ਲੈ ਕੇ ਜਾਵੇ। ਵਿਚਾਰੇ ਸੁਬੂਧਰ ਹੈ। ਥੋੜਾ ਜਹਾ ਦਾ। ਦੋਬਾ। ਤਾਂ ਬਚੀ। ਸਗਨੇ ਚ ਤਹਾ ਬੜੀਆ ਤਰਕੀ ਬਣੀ ਹੋਣੀ ਹੈ ਸਹਾਜਾਰ ਬਦਾਰ ਸਹੀ ਠੀਕ ਹੈ ਫਿਰ ਆਉਣਾ ਨਾ ਬਦਾਰ ਸੋ ਚਾਰ ਬਦਾਰ ਸੰਤ 40 ਬਦਾਰ ਤੋਂ ਜਾਂ ਬਦਾਰ ਦਾ ਭਾਦੂਏ ਉਹ ਦਾ ਜਨ ਉਸੇ ਦਾ ਜਨ ਬਹੁ ਜੜੇ ਜਿਵੇਂ ਦੇਖੋ ਜਨ ਬਦਾਰ ਸੇ ਕਾਟੇ ਹਨ ਜਨ ਕੋਈ ਨਹੀਂ ਹੋਣਾ ਹੈਗਾ ਜਨ ਜਨ ਕੋਈ ਨਹੀਂ ਹੋਣਾ ਜਨ ਬਦਾਰ ਕਿਉਂ ਗਿਆ ਇੱਕ ਪਾਸੇ ਤਾਂ ਕਹਿੰਦਾ ਮੈ ਕੋ ਜਨਮ ਨਹੀਂ ਬਿਜਮਰਾ ਇੱਕ ਪਾਸੇ ਕਹਿੰਦਾ ਜਨਪਦਾ ਉਹਦਾ ਸੁਭਿਓ ਹੈ ਉਹ ਵਹ ਤੇ ਬੋਚੋੜਾ ਖੜਾ ਕਰਕੇ ਲਾਸਾ ਜਾਉਂਦਾ ਦੀਆ ਦੇਖੋ ਜਦ ਬੱਚਾ ਮਾਰੇ ਪੇੜ ਕੇ ਬੱਚਾ ਪੂਰੇ ਦਾ ਪੂਰਾ ਬਹਾਰਾ ਦੇ ਕੋਈ ਉਹਦੇ ਚ ਘਟ ਜਾਂਦਾ ਕੁਝ ਉਹਨਾਂ ਅਸੀਂ ਤੋੜ ਦੇਣਾ ਫਿਰ ਉਹਦੇ ਦੀ ਬਹਾਰਾ ਕੇ ਉਹਦਾ ਸੈਸਰ ਨਾ ਹੋਗਾ ਆਟੋਮੈਟਿਕ ਉਸੇ ਘਟਿਆ ਹੀ ਹੈ ਕੁਝ ਉਹਨੂੰ ਮਿਹੜਾ ਬਹਾਰਾ ਗਿਆ ਨਹੀਂ ਅੱਲਾ ਕਪਿਆ ਨਾ ਹੱਕ ਕਪਿਆ ਹੀ ਉਹਨੂੰ ਉਹਨੂੰ ਜਨਮ ਕਿਉਂ ਕਹਿੰਦੇ ਨੇ ਜਨਮ ਦਾ ਕੀ ਹੈ ਪ੍ਰਗਟ ਹੋਇਆ ਉਹ ਪ੍ਰਗਟ ਹੋਣ ਨੂੰ ਜਨਮ ਕਹਿੰਦੇ ਨੇ ਪਰਦੇ ਤੋਂ ਖਾਲਸਾ ਉਹ ਪਰਦੇ ਤੋਂ ਬਾਹਰ ਆਇਆ ਹੈ ਉਰਜਾ ਜਲ ਬਗਿਆ ਹੋਇਆ ਹੋਰ ਜਦੋਂ ਕਿਤੇ ਪਹਿਲਾਂ ਸੀ ਕਿਉਂ ਜਦੋਂ ਕਿਥੋਂ ਤਾਂ ਨਹੀਂ ਕਿਹਦੇ ਕਹਿੰਦੇ ਜਦੋਂ ਬੰਦੇ ਨਾਲ ਕਹਿੰਦੇ ਉਹ ਉਰਜਾ ਜਲ ਤੋਂ ਬਾਹਰ ਆਇਆ ਉਹਦੇ ਬਾਹਰ ਆ ਵੀ ਗਿਆ ਨਾ ਘਰ ਵਿੱਚ ਵਿਚੋਂ ਘਰ ਵਿੱਚ ਸਭ ਕੁਝ ਆਪ ਕੋਲ ਦੀ ਕੀਤੀ ਆ ਸਾਡੀ ਤਾਂ ਔਰ ਕੀਤੀ ਹੋ ਜਨਮ ਵਿੱਚ ਇੱਥੇ ਆ ਗਿਆ ਗਿਆ ਹੁਣ ਦੋ ਦੋ ਇੱਕ ਗੱਲਾਂ ਕਹੀ ਤਾਂ ਯਾਦ ਰਹੇ ਜਾਂਦੀਆਂ ਸਾਰੀਆਂ ਕਦਮ ਕਹੀਏ ਯਾਦ ਨਹੀਂ ਦੀਆਂ ਇਹ ਜਨਮ ਦਾ ਉਹਦਾ ਫੂਟਾਡਾ ਭਰਦਾ ਬਨੇ ਵਿਆਹ ਹੋ ਗਿਆ ਉਹ ਦੋ ਨੰਬਰ ਤੋਂ ਬਦਲਿਆ ਬਦਲ ਗਿਆ ਉਹ ਹੋ ਗਿਆ ਤਾਂ ਆ ਗੱਲ ਦਾ ਹੁਣ ਇਹਨੂੰ ਜਰੂਰ ਪਤਾ ਯਾਰ ਪਤਾ ਇਹਨਾਂ ਨੇ ਜਿਹੜੇ ਬੰਦੇ ਨੇ ਦੇਖਿਆ ਹਨ ਧਾਰਮ ਅਰਥੇ ਕਾਮਪੂ ਇਹਨਾਂ ਨੂੰ ਚੇਪਾ ਲੈ ਮਾਨਸਾਨ ਨੂੰ ਜਿੱਥੇ ਕਾਮਨਾ ਹੋ ਉਥੇ ਮੁਕਤੀ ਕੇ ਮੰਗੜ ਚ ਕਾਮਨਾ ਦਾ ਆਇਆ ਦੀ ਮਾਇਆ ਦੀ ਕਾਮਨਾ ਦੇਣ ਦਾ ਸਭਾ ਕਹਿੰਦਾ ਕੈਸੇ ਪਾਉਣਾ ਪਤਵੰਤ ਗੱਲ ਕਰਦਾ ਕਾਮਨਾਵਾਂ ਮਾਇਆ ਤਾਰੀ ਤਬਨੋ ਕਾਮਨਾਵਾਂ ਨੂੰ ਰੀਹ ਗਦਨੇ ਇਹ ਉਲਟੇ ਰਾਏ ਥੋਈ ਪੈ ਗਏ ਇਹ ਤਾਂ ਪਹਿਲਾ ਜਿਹੜਾ ਪੈ ਰਣ ਮਨੁੱਖ ਨੂੰ ਭੁੱਲਿਆ ਵਿੱਚ ਲਭ ਲੋਭ ਕਾਰ ਪਹਿਲਾ ਕਦਮੇ ਭੁੱਲ ਗਿਆ ਪਹਿਲਾ ਕਦਮ ਜਿਹੜਾ ਸੀ ਉਹਨੂੰ ਪਹਿਲਾ ਕਦਮ ਹੀ ਉੱਟ ਲਿਆ ਮਾਇਆ ਪਨਾਹਦਾਰ ਸੇ ਦਾ ਕਾਮਦਾਰ ਸੇ ਕਾਮਦਾਰ ਆਪਣੇ ਕਾਬੂ ਨਹੀਂ ਛੱਡਨੀ ਆਪਣਾ ਹੰਕਾਰ ਨਹੀਂ ਛੱਡੋ ਜਦੋਂ ਬਤਾਉਣ ਕਾ ਹੁਕਮ ਨਾ ਮਿਲ ਸੇ ਡਾਕਟਰ ਕੋ ਕੀ ਹੁਕਮ ਨਾ ਕਰਦੀ ਦਾ ਆਪਣੀ ਮਰਜ਼ੀ ਹੈ ਪਨਾਹ ਮਿਲਤਾ ਮੈਂ ਜੀ ਡਾਕਟਰ ਜਾਨਾ ਵੀ ਕੋਰਦਾ ਤਾ ਤੇਰੇ ਹੈ ਜੀ ਅੰਦਰ ਬਿਜਲੀ ਦਾ ਖਤਮ ਤੇ ਮੇਰੇ ਕੋ ਬੇ ਕੀ ਕਰਨਾ ਕਰੇ ਨਾ ਬਿਜੂ ਕੱਲੂ ਬਹਿਣੇ ਵੇ ਬਤਾ ਮਰ ਗਿਆ ਜੀ ਕਹਿਣ ਗਿਆ ਕਿ ਜੱਗਾ ਡਾਕਟਰ ਆ ਜਿਹੜਾ ਉਹਦਾ ਬਚਿਆ ਹੀ ਨਹੀਂ ਕੋਈ ਉਹ ਬਚਣਾ ਆਹ ਤਾਂ ਲੱਛਣ ਦਾ ਹੋਣਾ ਜ਼ਰੀਏ ਬਰੀਦ ਦੇ ਲੱਛਣੇ ਨਹੀਂ ਆ ਬਚਨ ਡਾਕਟਰ ਤਾਂ ਬਚਾਊਗਾ ਕਿ ਬਰੀਦ ਦੀ ਵੀ ਛਾ ਹੋਵੇ ਉਹ ਪਰਹੇਜ ਵੀ ਰੱਖੇ ਦਵਾਈ ਵੀ ਨਿਯਮ ਬਦ ਲਵੇ ਪਾਣੀ ਇਸ ਕਰਕੇ ਦੇਚ ਜੋ ਵੀ ਕੋਸੀ ਦਿੱਤਾ ਹੈ ਗੁਰਮਾਨ ਦੇ ਵਿੱਚ ਉਹ ਸਾਨੂੰ ਉਹਨੂੰ ਮੰਨਦੇ ਹੀ ਨਹੀਂ ਆਊਗਾ ਜੇ ਪਰਮਰਸ਼ਨ ਆਊਗਾ ਤਾਂ ਸਭ ਕੁਝ ਬਰਾਦਰ ਹੋਊਗਾ ਇਹ ਪਰਮਰਤ ਨਹੀਂ ਹੋਣਾ ਸਭ ਪ੍ਰਾਪਤ ਕੁਝ ਹੋਵੇ ਫੇਰ ਸੁਣ ਲੋ ਸੁਣਨੀਆਂ ਗੱਲਾਂ ਨੂੰ ਸੁਣ ਤੇ ਸੁਣਦੇ ਰਹੀਂ ਸੁਣਨ ਵਾਲੀ ਗੱਲ ਵੰਡੀ ਪੜਨ ਵਾਲੀ ਗੱਲ ਵੰਡੀ ਕਲ ਬੁੱਧੋ ਸੁਣਿਆ ਹੁੰਦਿਆ ਮਰਨ ਕੀਤਾ ਹੋਇਆ ਖੋਰ ਬੁੱਧ ਦੇ ਵਾਜ ਮਨਦੇ ਕਹਿੰਦਾ ਮਨਦੇ ਅਬੀਲਾ ਠੀਕ ਗੁਰਬਾਨੀ ਨਹੀਂ ਆਇਆ ਕੋਈ ਪਾਉਦੀ ਜੜ ਕੇ ਜੇ ਪ੍ਰਵਤਤ ਨਹੀਂ ਆਇਆ ਤਾਂ ਕੀ ਕੁਝ ਹੋਏ ਬਜਾ ਬੁੱਧਨਵਾ ਆਪਾਂ ਬੰਦਲੀ ਪਿਆਣੀ ਸੱਚ ਸਾਰੇ ਮੰਤਰ ਪਰਮਾਤਮਾ ਦੇ ਆਦੇ ਦੇ ਬਾਣੀ ਤੋਂ ਟਪੜੀ ਕਰਦੇ ਹੈ ਨਾ ਕਹਿੰਦੇ ਜੀ ਸੀ ਤਾਂ ਗੁਰਵਾਨ ਸ਼ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੈ ਉਹਦੇ ਸਿਰ ਪਰ ਕੇ ਮੈਂ ਮੰਨਦਾ ਨਾ ਪੰਨਰ ਦਾ ਅਰਤੀ ਆਵਾਜ਼ ਆਇਆ ਏਦਾਂ ਆਇਆ ਹਾਂ ਚਾਰ ਪਦਾਰਥ ਜੇ ਕੋ ਮੰਗੇ ਜੇ ਕੋ ਚਾਰੇ ਪਦਾਰਥ ਮੰਗਦਾ ਹੋਵੇ ਆ ਚਾਰ ਪਦਾਰਥੇ ਘਾਹੋਂ ਕੁਛ ਨਹੀਂ ਐਦੋਂ ਕੁਛ ਨਹੀਂ ਹੋ ਸੰਸਾਰ ਕਿਤੇ ਵੀ ਐਦੋਂ ਵੱਡੀ ਗੱਲ ਕੋਈ ਨਹੀਂ ਜੇ ਕਿਸੇ ਨੂੰ ਚਾਰ ਪਦਾਰਥ ਚਾਹੀਦੇ ਹੋਣ ਫਿਰ ਸਾਧ ਜਨਾ ਕੀ ਸੇਵਾ ਨਾਲ ਉਹ ਕੀ ਸੇਵਾ ਲੱਗੇ ਹੁਣ ਇੱਥੇ ਇਹਦਾ ਅਰਥ ਬਦਲ ਗਿਆ ਜਿਹੜੇ ਕਹਿੰਦੇ ਸੱਚਾ ਜਦੂਮਾ ਦੀ ਸੇਵਾ ਚ ਰਜੋ ਬਿਲਕੁਲ ਗਲਤ ਪੂਰੇ ਸੱਚਾ ਜਦੂਮਾ ਮਰ ਗਿਆ ਜਿਹੜੀ ਸੱਚਾ ਜਦੂ ਕਰਦੇ ਹੁੰਦੇ ਨੇ ਉਸ ਹੀ ਸੇਵਾ ਲੱਗ ਜਿਵੇਂ ਉਹ ਕਰਦੇ ਸੇ ਜੇ ਕਿਸੇ ਨਾ ਵਕੀਲ ਬਣ ਬੀਏ ਕਰਕੇ ਅੱਲ ਵੀ ਆਲੇ ਕਾਲੇ ਪੜੇ ਉਹ ਪੜਾਈ ਕਰੇ ਤਾਮੜ ਨੂੰ ਪੜਨਾ ਤੁਹੀਂ ਸਾਚ ਜਾਨੂ ਮਾੜੀ ਸੇਵਾ ਕਰਕੇ ਜਿਵੇਂ ਪੜ ਚੋਕੇ ਜਿਕੇ ਨੂੰ ਕਿ ਜਿਵੇਂ ਉਹਨੂੰ ਮਿਲੀ ਆ ਉਸੇ ਨਾਲ ਦੀ ਸੇਵਾ ਨਾਲੇ ਕੁਝ ਮੜਿਆ ਲੈਣ ਨੂੰ ਸੇਵਾ ਦਾ ਬਾਬੇ ਬੁੱਢੇ ਨੇ ਜਿਆਦਾ ਦਿੱਤੀ ਆ ਨਾ ਜਿਵੇਂ ਪੜਾਈ ਦੀ ਮਿਲੀ ਅੱਲੰਬਾ ਜਮਾ ਕੀਤੀ ਹੈ ਸੇਵਾ ਬਾਬੇ ਬੁੱਢੇ ਦੀ ਕਾਇ ਗੁਰੂ ਦੀ ਕੀਤੀ ਹੈ ਫੁੜਾਈ ਨਾਲ ਕਿ ਉਹ ਸਾਰਾ ਕੋਰਸ ਉਹਨੇ ਕਰਨਾ ਪੈਣਾ ਤਾਂ ਜਿਵੇਂ ਅੰਕਰੇਨ ਕੀ ਸਰ ਜਿਵੇਂ ਆਪਰਦਾਨਾ ਕੋਰਸ ਕੀਤਾ ਉਹ ਕੋਰਸ ਕੋ ਰਾਮਦਾਸ ਜੀ ਆਮਰਦਾਸ ਜੀ ਜਿਨ੍ਹਾਂ ਜਿਨ੍ਹਾਂ ਕੋਰਸ ਉਹਨੇ ਕਰ ਲਿਆ ਉਹਦੀ ਬਾਣੀ ਵੀ ਨਹੀਂ ਸੀ ਸਾਡੇ ਕੋਲ ਜਿਹੜਾ ਕੋਰਸ ਕੀਤਾ ਸਬੂਤ ਵੀ ਹੈ ਸਾਡੇ ਕੋਲ ਇਤੋਂ ਵੱਡੀ ਸਬੂਤ ਹੋਣੀ ਹੋਊਗਾ ਜਿਹੜਾ ਵੀ ਉਹ ਕੋਰਸ ਕਰਦਾ ਰਿਹਾ ਉਹਦਾ ਇੰਤਹਾਰ ਦਸਾਰਿਆ ਗੁਰਬਾਣੀ ਸਾਡੇ ਕੋਲ ਤੈਨੂੰ ਦੱਸ ਤੀ ਦੱਸੋ ਕੀ ਹੈ ਫਰਕ ਦੱਸੋ ਕਿੱਥੇ ਇੱਕ ਝੱਲੂ ਜੇ ਦਿੱਤਾ ਵੀ ਅਨੇਕਾਂਾਂ ਪਹੂਗੋ ਜੋ ਸਾਜਣਾ ਨੇ ਕਬ ਕੀਤਾ ਇਨਾਨ ਕਰੇ ਸਾਰੀ ਜ਼ਿੰਦਗੀ ਲਾਈ ਲੈ ਕੇ ਲਾਈ ਨਾ ਫਿਰ ਅਬਦਲ ਨਹੀਂ ਲਾਈ ਅਬਦਲ ਨੂੰ ਵੀ ਗਿਆ ਕੋਲ ਤੇ ਕਿੰਨਾ ਨਾਨਕ ਜੀਸਰਾਇਆ ਮਦਦ ਇਹ ਨਾਨਕੋ ਆ ਗਿਆ ਉਥੋਂ ਉੱਥੋਂ ਕਹਤਾ ਵੀ ਭਾਈ ਕੋਈ ਜਾ ਤਾਂ ਖਡੂਰ ਸਾਹਿਬ ਇਹ ਰਹਿ ਗਿਆ ਉਹ ਆ ਦੋਇ ਕਪੜੇ ਪਾ ਲੈਣ ਜੀ ਤਾਹ ਨਾਲੇ ਕਿਸੇ ਨਾਲ ਮੁਸਰ ਕੋਲ ਆਦੂ ਉੱਥੇ ਆਉਣਾ ਸੀ ਪੜੜੀ ਲਾ ਪਟਣ ਜਿਆੜਾ ਉਹ ਕਮਾਇਆ ਜਾਂਦਾ ਜਨਮ ਮਾਰੇ ਲੈ ਕੇ ਇਹ ਸਭ ਪੂਰੀ ਕਹਾਣੀ ਪੜੀ ਸੀ ਫਿਰ ਰਾਤ ਹੋਣੀ ਹੋਈ ਹੈ ਚੱਲੋ ਇਹ ਕਹਿੰਦੇ ਸਾਕੇ ਦੇਖਾਂਗੇ ਫੋਟਾ ਨੇ ਵੀ ਕੀਤੀ ਤੇ नहीं ਸ਼ਰਤ ਪਰ ਉਹਨਾਂ ਨੇ ਜੇ ਬਾਣੀ ਦੇ ਦਿੱਤੀ ਫਿਰ ਉਹ ਵੀ ਪੂਰੀ ਜੇ ਬਾਣੀ ਦੇ ਹੀ ਲਿਖੀ ਚੱਜ ਗੁਰੂ ਨੇ ਗੜਾ ਬਾਣੀ ਲਿਖੀ ਹੈ ਬਾਣੀ ਲਿਖਣਾ ਨਾ ਸ਼ਰਤ ਨਹੀਂ ਹੈ ਤਾਂ ਮੰਨ ਤਾਂ ਸੋਪਣਾ ਜਾਂ ਦੇ ਉਹੀ ਹੁੰਦੇ ਨੇ ਸਮਝ ਜੋ ਵੀ ਹਾਂ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗਦੀ ਸਾਧ ਜਨਾ ਕੀ ਸੇਵਾ ਜੋ ਸਾਧ ਜਨਾ ਕੀ ਸੇਵਾ ਜੈ ਜੀ ਸੇਵਾ ਸਾਜਨ ਕਰਦੇ ਉਧਰ ਸਾਜਨ ਕਰਨੀ ਚਾਹੀਦੀ ਹੈ ਉਹ ਸੇਵਾ ਸਾਜਨਾ ਦੀ ਸੇਵਾ ਨਹੀਂ ਕੀ ਸੇਵਾ ਸਾਜਨਾ ਬਾੜੀ ਸੇਵਾ گاڑی کہ ساجدن سے پکڑتے ہیں ایسی سیب ہاں جی جے کو ساجدن کی کرتے تھے شبت علن پر چلاونے ہو روٹیاں نہ چلاوے شبت دا چلاوے نہ جی پفر چلاے پر شبت توڑنا اوی کھٹی ہے اوج کھٹی ہے روٹیاں دا علن پر چلاون لو دین اندر کیسے جاؤ ਸਾਜਨ ਆਉਣੇ ਸੇਵਾ ਚੜਤੀ ਸੰਤ ਕਹਣ ਲੱਗੇ ਸਾਧ ਕਹਣ ਲੱਗੇ ਸਾਜਨ ਨੂੰ ਕੇ ਬੈਠੇ ਸੇਵਾ ਚੜਤੀ ਹੋ ਨੰਦਰ ਸ਼ਬਦ ਅਗੇ ਵੀ ਚਲਾਇਆ ਫਿਰ ਤੁਸੀਂ ਜੇ ਨੰਦਰ ਚਲਾਉਂਦਾ ਅਜ ਭੁੱਖੇ ਨੂੰ ਉੱਤੇ ਨਾਮ ਤੋਂ ਦੋ ਸਿਕਿਨੀ ਭੁਖੇ ਹੋ ਨੋ ਪਾਓ ਸਿਕਿਨੀ ਭੁੱਖਾ ਨੰਦਰ ਉਹ ਲੱਗ ਬੈਠੋ ਨਰੋਕੀਂ ਆ ਬਾਹਰ ਦੀ ਭੁੱਖਾ ਹੈ ਉਹਦੀ ਲੋਕਾਂ ਨੂੰ ਬੜਾ ਗਰੀਬੀ ਆ ਉਹ ਗੱਗਰੀ ਬੀਸੀ ਜਿਹਦੇ ਦਾ ਆਟਾ ਜਿਹਦੇ ਦਾ ਚੁੱਲਾ ਰੋਟਾ ਉਹ ਤਾਂ ਤੇ ਕਿਹਦੇ ਸਬਦਾਈ ਨਹੀਂ ਸੀ ਪੁਰਾਣੇ ਜਵਾਨਿਆਂ ਦੀ ਗੱਲ ਹੈ ਉਹ ਤਾਂ ਇਹ ਗੱਲ ਹੈ ਸਾਜਨਾ ਧੀਰ ਕੀ ਦੇ ਵਿੱਚ ਫਰਕ ਪਾ ਲਿਆ ਕੋਹ ਨਾਲ ਆਪਣੀ ਫੈਨਰੀ ਗੱਲ ਹੋ ਔਰ ਸੌਖਾ ਹੀ ਬਦਲਣਾ ਕਿ ਸੌਖਾ ਆਮ ਲੋਕਾਂ ਨੂੰ ਇਹ ਗੱਲ ਨਹੀਂ ਕਿਸੀ ਆਮ ਲੋਕਾਂ ਸਾਧ ਜਨਾ ਬਾਣੀ ਸੇਵਾ ਜਿਵੇਂ ਉਹਨਾਂ ਨੇ ਸੇਵਾ ਕੀਤੀ ਹੈ ਜਿਦੀ ਕੀਤੀ ਹੈ ਜਿਦੀ ਕੀਤੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰ ਕੀ ਸੇਵਾ ਕੀ ਹੁੰਦੀ ਹੈ ਸ਼ਬਦ ਵਿਚਾਰ ਸ਼ਬਦ ਵਿਚਾਰ ਕੀਤਾ ਜੀ ਨਾਮ ਕਰਨ ਸ਼ਬਦ ਵਿਚਾਰੇ ਕਰਿਓ ਆਪ ਇਹ ਸੇਵਾ ਹੈ ਵੇਸ ਸਾਧਰੂ ਲੜਕੋੰਦੇ ਵਿੱਚੋਂ ਗਿਆਨ ਬਲੂਗਾ ਆਰਖਾਓ ਕਾਲਖਾਏ ਕਿਚੋ ਚੋਲੇ ਅਚਾਨਕ ਦੋਵੇਂ ਨਾਨ ਜ਼ਰਾ ਸੁਹਾਨਾ ਅੱਛਾ ਥੋੜੇ ਥੋੜੇ ਹੌਲੀ ਹੌਲੀ ਰਾਹ ਪਾਣ ਲੂ ਸਾਰਾ ਦੇਖ ਲੂਗਾ ਕਿ ਇਹ ਵੀ ਕਰਦਾ ਰਹੇ ਘਾਲ ਖਾ ਕੇ ਕੁਛ ਵਿਚਾਰ ਕੇ ਸ਼ਬਦ ਆਪ ਖਾਵੇ ਤੇ ਉਹ ਹੋਰ ਕਿਸੇ ਰੂਪ ਤੋਂ ਜਿੰਨਾ ਦਊਗਾ ਜਿੰਨਾ ਵਧਿਆ ਜਾਊਗਾ ਉਹਨਾਂ ਬਦੂਗਾ ਘਟਦਾ ਜੀ ਘਟਦਾ ਹੁੰਦਾ ਹੀ ਨਹੀਂ ਹੈ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਾਲ ਨਾਮ ਰੇਸ਼ ਦਾ ਗਾਵੇ ਜੇ ਕੋ ਆਪਣਾ ਦੁੱਖ ਹਟਾਵੇ ਉਹ ਦੁੱਖ ਦਾ ਸਾਰਿਆਂ ਨੂੰ ਦੁੱਖ ਤਾਂ ਕੋਈ ਵੀ ਨਹੀਂ ਜਾਂਦਾ ਸਭ ਤੋਂ ਪਹਿਲੀ ਗੱਲ ਅਗਲੇ ਨੂੰ ਹੁੰਦੀ ਆ ਜੇ ਕੋਈ ਸੰਤ ਕੋ ਜਾਣਦਾ ਕਿਸੇ ਧਰਮ ਆਏ ਉਹ ਆਪਣਾ ਦੁੱਖ ਹਟਾਤਾ ਜਾਂਦਾ ਦੁੱਖੇ ਤਾਂ ਸਮਝਾਂਦਾ ਦੁਖੀ ਹੋਏ ਲੋਕ ਜਾਣਦੇ ਨੇ ਜੇ ਕਹਿੰਦੇ ਕੋਈ ਆਪਣਾ ਦੁੱਖ ਮਟਾਉਣਾ ਚਾਹੁੰਦਾ ਹੁੰਦਾ ਤਾਂ ਸਾਡੇ ਕੋਲ ਆਉਂਦੀ ਲੋੜ ਨਹੀਂ ਆ ਘਰੇ ਦੇਤਾ ਸਭਿਹਾ ਸਾਹਰ ਨਾਮ ਰਿਦੇਸ ਹਸਤਾ ਕਦੇ ਕੋ ਜਾਣ ਦੀ ਲੋੜ ਨਹੀਂ ਐ ਕਿਦੇ ਸੰਤ ਨੂੰ ਪੁੱਛਣ ਦੀ ਲੋੜ ਨਹੀਂ ਐ ਆਰ ਦਾ ਨਾਮ ਲੈਤਾ ਤਾਂ ਉਹ ਇਹਨੂੰ ਗਾਉ ਰਿਦੇ ਪਸਵਾ ਕੇ ਨਾ ਗਾਇਓ ਸਪੀਕਰ ਲਾ ਕੇ ਗਾਉਣ ਲੱਗੇ ਰਿਦੇ ਗਾਉ ਰਿਦੇ ਸੱਤ ਗਾਲ ਇੱਧਰੇ ਗਾਉਣਾ ਸੀ ਸੁਣਣਾ ਸੀ ਕਿਸੇ ਤੂੰ ਹੱਥ ਪੈਰ ਕੰਬ ਕਰਦੇ ਵੀ ਗਾਉਣਾ ਸੀ ਇਹ ਗੱਲ ਕਹੀਏ ਇਹ ਜਿਹੜਾ ਕਬੂ ਸੀ ਇਹ ਇਹਨਾਂ ਨੇ ਰੋਕਿਆ ਸੰਤਾ ਕੋਲ ਜਾਨ ਲੂਰ ਬਣਦੀ ਨੇ ਕੋਈ ਨਾ ਪਤਾ ਨਹੀਂ ਘਰ ਕਰ ਇਦਾਂ ਹੋਊਗਾ ਠੱਗ ਇਕੱਠੇ ਹੋ ਜਾਂਦੇ ਨੇ ਅੱਗੇ ਵੀ ਤਾਂ ਸੀ ਕਈ ਵਾਰ ਜਦ ਆ ਹੁੰਦਾ ਹੈ ਮੌਸਮ ਹੁੰਦਾ ਕੋਈ ਦਿੱਤਾ ਕਰੇ ਤੇ ਬਾਅਦ ਫਿਰ ਹੋ ਆਗੇ ਸੀ ਨਾ ਅੰਦਰ ਥਾਂ ਦੇ ਉਹ ਵਿਚਾਰੇ ਪ੍ਰੈਸ਼ਰ 'ਚ ਹੁੰਦੇ ਨੇ ਉਹਨਾਂ ਜਦ ਬਿਰੂ ਪਦਾ ਜੀ ਨਾਲ ਜਨ ਸੰਨ 60 ਤੱਕ ਕੋਈ ਸੰਤ ਇੰਨਾ ਨਹੀਂ ਸੀ ਬੋਲਿਆ ਥੋੜੀ-ੋੜੀ ਮੌਜੂਦ ਕੋਈ ਖੁੱਲ ਕੇ ਨਹੀਂ ਤੇ ਬੋਲਦਾ ਜਾਂ ਤੇ ਇਤਰੋ ਕੋਈ ਜਵਾਬ ਨਹੀਂ ਆ ਖੁੱਲ ਕੇ ਬੋਲਣ ਲੱਗੇ ਇੰਨਾ ਖੁੱਲ ਕੇ ਇਹਨਾਂ ਨੇ ਝੂਠ ਦਾ ਪ੍ਰਚਾਰ ਕੀਤਾ ਇਹ ਤਾਂ ਸੰਤਾ ਦੇ ਸੰਭਾਲ ਨਾਲ ਜਗੜਾ ਜਗੜਾ ਨਹੀਂ ਸਾਹਸ ਕਰੇ ਗੱਲ ਗਵਾਣੀ ਦੀ ਇਹ ਹਟ ਗਏ ਤੇ ਹਟ ਗਏ ਉਹ ਅਕਾਲੀਆਂ ਨੇ ਗਾਇਆ ਤਾਂ ਤੁਹਾਨੂੰ ਤੁਸੀਂ ਕਿਵੇਂ ਅਸੀਂ ਪਿੱਛੇ हट ਗਏ ਤੇ ਸਾਰਾ ਝੂਠ ਕਰ ਗਿਆ ਪਹਿਲਾਂ ਨਿਗਾਹ ਰੱਖਦੇ ਸੀ ਅੱਜ ਤੱਕ ਤਾਂ ਨਿਗਾਹ ਰੱਖਦੇ ਸੀ ਪ੍ਰਚਾਰਕ ਨੂੰ ਆਉ ਜਾ ਕੀ ਹੋ ਜਾ ਸ਼ਿਕਾਇਤ ਹੋ ਜਾਂਦੀ ਸੀ ਕਰਦੇ ਸੀ ਕੋਈ ਸੋਣਾ ਕਾਹਦਾ ਖਰਾਉਣਾ ਕੋਈ ਸ਼ਿਕਾਇਤ ਕਰਦੇ ਨੇ ਕਾਹਦਾ ਖਰਾਉਣਾ ਦੀ ਪਤਾ ਉਹ ਆਏ ਤਾਂ ਤੇ ਸ਼ਿਕਾਇਤ ਕਰਦੇ ਬੜਾ ਸਾਡੇ ਕੋਲੇ ਉਲਟੀ ਸਿਚੁਏਸ਼ਨ ਇਹ ਤਾਂ ਉਹਨਾਂ ਨੇ ਝੂਠ ਦਾ ਦਰਖਤ ਆਪਣਾ ਬਣਾਇਆ ਹੋਇਆ ਚਲੋ ਹਟ ਜੂਗਾ ਇਹਨੂੰ ਬੜਾ ਗਿਆਨ ਅਜਿਹਾ ਕਹਿੰਦਾ ਗਿਆਨ ਹੋਵੇ ਕੱਲ ਮੈਂ ਠੀਕ ਅਪਰੇ ਕਰ ਸਰੂਕੀਏ ਕੋਈ ਕਰੇ ਕੱਬ ਕਰੇ ਇਹ ਸੱਚ ਦਾ ਤੇਰਾ ਆਚਰਣ ਨੂੰ ਸਿਖਾ ਰਹਾ ਹੈ ਇਹ ਗੱਲਾਂ ਅதிகਾ ਗੱਲਣਾ ਗੱਲ ਕਰਨਾ ਕੋਈ ਕਰੇ ਉਹ ਸਦਨ ਕਹਾਈ ਕੀਤਾ ਉਹਨੂੰ ਬੜਿਆ ਬੁਲਗੀ ਕੋਈ ਕਰੇ ਸ਼ਰਮ ਝੂਟਾ ਇਹ ਤਾਂ ਉਹਦੇ ਚੋਮੜਣਾ ਕੋ ਸੰਝਾ ਸਾਰੀ ਦੁਨੀਆ ਕਰੇ ਸੰਗੀਤ ਰਾਜ ਜਿਸਰ ਵੀ ਭక్తి ਹੋਣਾ ਚਾਹੀਦਾ ਜਿੰਨੇ ਜਿਆਦਾ ਲੋਕਾਂ ਨੂੰ ਨਾ ਚੰਗਾ ਕਮੜਾ ਜੰਦਾ ਝੂੜ ਜਿਹੜਾ ਹੋਊਗਾ ਲੁਗਦਾ ਫਿਰੂ ਜਿਹੜਾ ਦੁਨੀਆ ਨੂੰ ਖਰਾਬ ਝੂਠੇ ਕਰਦਾ ਫਸਲ ਦਵਾ ਦੇ ਨੂੰ ਖਲਾਬ ਕਰਦਾ ਗੰਡਵਾਦ ਤੇ ਬੜੀ ਖਲਾਬ ਹੈ ਗੰਡਵਾਦ ਨੂੰ ਲੁਗੜ ਨੂੰ ਧੋ ਨਹੀਂ ਬਿਲੜ ਜੇ ਸਾਰੇ ਲੋਕ ਪ੍ਰਚਾਰ ਕਰਨ ਲੱਗਿਆ ਤਾਂ ਦੇਖੋ ਆਪਣਾ ਜੋਖ ਮਟਾਵੇ ਹਰ ਸਾਡਾ ਨਾਮ ਰਿਦੇਸਾਦ ਗਾਵੇ ਹਰ ਸਾਡਾ ਨਾਮ ਰਿਦੇਸਾਦ ਗਾਣ ਕੋ ਕੁਰਬਾਨੀ ਤੁਹਾਡੇ ਕੋਲ ਹੈ ਕੀ ਲੋੜ ਹੈ ਸਾਹਿਬ ਰੋਜ਼ ਪੜਦੇ ਘਰਾਂ ਅੰਦਰ ਨੂੰ ਪਤਾ ਲੱਗਾ ਵੀ ਕੀ ਕਹਿੰਦੀ ਇਹ ਤਾਂ ਕੋਈ ਔਖੀ ਗੱਲ ਵੀ ਨਹੀਂ ਸੀ ਇਹ ਤਾਂ ਕੋਪਾ ਬਸ ਇਓਖੀ ਦੀ ਕਿ ਵਿੱਚ ਕਹੀ ਹੋਈ ਹੈ ਇਹੀ ਨੇ ਤੁਸੀਂ ਚਰਕੀ ਤਾਰ ਹਾਂ ਇਹ ਮੇਰੇ ਕੋਲ ਕਈ ਵਰਗੇ ਸੰਤ ਨੇ ਸੀ ਹਾਂ ਕਈ ਵਰਗੇ ਸੰਤ ਜੇ ਕੋ ਆਪਣੀ ਸੋਪਾ ਲੋਰੇ ਸਾਧ ਸੰਗੀ ਇਹ ਹੋਮੇਸ਼ ਹੋਰੇ ਜੇ ਕੋ ਆਪਣੀ ਸੋਪਾ ਲੋੜੇ ਜੇ ਚਾਹੁੰਦਾ ਵੀ ਮੇਰੀ ਸੋਪਾ ਹੋਵੇ ਸੰਤ ਚਾਹੁੰਦਾ ਨਾ ਸੋਪਾ ਹੋਵੇ ਕਹਿੰਦੇ ਆਪਣਾ ਮਨ ਨੂੰ ਸਾਧ ਕੇ ਸੰਗੀ ਲਾ ਸਾਧ ਸੰਗੀ ਜੇ ਲੋੜ ਤੇਰਾ ਮਾਨਨ ਸੰਗੀ ਬੁੱਧੀ ਨੂੰ ਘੈ ਨੂੰ ਸਾਧ ਲੈ ਪਹਿਲਾਂ ਨੂੰ ਸਾਧ ਬਣਾ ਲੈ ਕੱਪੜੇ ਪਾ ਕੇ ਸਾਧ ਨੂੰ ਬਣ ਇਹ ਹੋਮੇ ਸ਼ੋਦੇ ਹਾਂ ਜੇ ਹੋਮੇ ਸ਼ੋਦੇ ਇਹ ਹੋਮੇ ਝੜਦੇ ਮੈਂ ਦਾਸ ਹਾਂ ਇਹ ਦਾਸ ਹੋ ਤਾਂ ਛੁੱਟੂ ਸੰਤ ਗਾਇ ਤੇ ਹਮੇ ਨਹੀਂ ਛੁੱਟਦੀ ਹੁੰਦੀ ਸਾਧ ਬੰਡੂ ਤਾਂ ਇਹ ਨੋਮੇ ਛੁੱਟੂਗੀ ਆਪਣਾ ਸੰਗੀ ਨੂੰ ਸਾਧੇ ਮਨ ਨੂੰ ਪਹਿਲਾਂ ਬਣਾਵੇ ਸਰਦਾਰ दास कहा ਕਰੇ ਹਮੇਸ਼ਾ ਕਰੇ ਕੋਈ ਛੇੜੇ ਸੱਚੇ ਮਾਰਗ ਚੱਲਦੇ ਆ ਉਸ ਤੋਂ ਬਰੇ ਜਵਾਨਾਂ ਉਸ ਤੋਂ ਬਰੇ ਜਾਨ ਅੱਪੇ ਆਪੀ ਹੋਈ ਨਹੀਂ ਉਸ ਤੋਂ ਤੋਂ ਉਸ ਤੋਂ ਤੇ ਲੈ ਤੁਸੀਂ ਕਹੋ ਨਾ ਕਰੋ ਤੁਮ ਵੀ ਇਹ ਜਣਾ ਲੈ ਜਿਹੜਾ ਟਾਪ ਕੇ ਜਿਆਦਾ ਕਰਮ ਜੇ ਜਿੰਨਾ ਕੋਈ ਟਾਪ ਨਾਲ ਵੀ ਜਿਆਦਾ ਹਣ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ ਕਹੇ ਆਵੇ ਜਗ ਬੰਦ ਤੋਂ ਡਰਨ ਵਾਲੇ ਆਉਂਦੇ ਸੁੱਤਖਣ ਕੋਈ ਸਾਰਿਆਂ ਨੂੰ ਦਵਾਈ ਘਰੇ ਦਸਦੀ ਕਿ ਤੁਝੇ ਆਪਣਾ ਘਰੇ ਲਾਜਾ ਡਾਕਟਰ ਬਣਾਤੇ ਸਾਰੇ ਜਿਹੜੇ ਆਪਾਂ ਤੋਂ ਆਇਆ ਲਾਇਆ ਉਹਨਿਆ ਪਤਾ ਹੀ ਆ ਵੀ ਚਲੋ ਜੀ ਮੈਡੀਕਲ ਸਟੋਰ ਤੋਂ ਅਜੀ ਲਿਆਓ ਸਾਟ ਕੋ ਡਾਮ ਦੀ ਲੋੜੀ ਦੀ ਆ ਗਿਆ ਤੁਹਾਨੂੰ ਦੇਖਦਾ ਜੇ ਕੋ ਜਨਮ ਮਰਨ आम ਲੋਕ ਆ ਆਪਣਾ ਦੁੱਖ ਪੜਾਵੇ ਸੰਸਾਰੀ ਦੁੱਖ ਦੀ ਗੱਲ ਕਰਦਾ ਸਦਾ ਆ ਆਦਮੀ ਜਾ ਕੇ ਉਹ ਕਹਿੰਦਾ ਕੋਈ ਹਰ ਹਾਲ ਨਾ ਹੋਵੇ ਤੇ ਦੱਸਦਾ ਤੁਰਤ ਆਮ ਗਾਉਂ ਗਏ ਪਾਣੀ ਚਲੋਗੇ ਪਾਣੀ ਤੇ ਰਹਿੰਦੀ ਹੈ ਜੇ ਤੁਸੀਂ ਪਾਣੀ ਤੇ ਰਹੋਗੇ ਵੀ ਪਾਣੀ ਤੇ ਰਹੋ ਉਹਦਾ ਦਿੱਤਾ ਹੈ ਤੋ ਜਾ ਤੁਸੀਂ ਇਹ ਪੜੋਗੇ ਵੀ ਭਈ ਇਹ ਤਾਂ ਝਾਤ ਹੈ ਸੁਖੜ-ਦੁਖੜ ਤੂੰ ਹੋ ਗਿਆ ਬੁੱਧਾ ਬੁੱਧਾ ਦਾਤਾ ਦਾਤਾ ਮੰਨੈ ਨੂੰ ਉਹ ਰਗਾ ਤੇ ਮੰਨਦਾ ਚਲ ਆਪੇ ਸਲਾਮੁਅਲੈਕੁਮ ਜੇ ਕੋ ਜਨਮਗ੍ਰੰਥ ਅਗਲੀ ਆ ਗਈ ਜਨਮਗ੍ਰੰਥ ਉਹ ਆਉਗਾ ਕੋਈ ਮਤਲਬ ਆ ਮੁਕਤੀ ਲੈਣ ਵਾਲਾ ਮੁਕਤੀ ਲੈਣ ਵਾਲਾ ਦੁੱਖ ਆਲਾ ਨਹੀਂ ਉਹ ਅਗਲੀ ਸਟੇਜ ਆਲਾ ਜੇ ਕੋਈ ਜਨਮ ਬਣਦਾ ਤਾਂ ਸਾਧ ਜਨਾ ਕੀ ਸਾਡੀ ਪਰੇ ਜਨਾ ਸਾਡੀ ਪਰੇ ਫਿਰ ਜਿਹੜੇ ਸਾਧ ਆ ਜਾਂਦੇ ਉਹਦੀ ਛਾਣ ਪੈ ਜੇ ਉਹ ਮਾਰਾ ਹੁਣ ਤੁਸੀਂ ਦੱਸੋ ਜਿਵੇਂ ਤੁਸੀਂ ਕਹੂਗੇ ਜੇ ਕੋਈ ਪੜਾਉਂ ਕਰਾਂਗੇ ਉਹਦੇ ਤੋਂ ਮੈਨੂੰ ਜਨਮ ਬਣਦਾ ਚੱਕਰ ਹੈ ਜੋ ਬਾਹਰ ਤੁਸੀਂ ਨਿਕਲਿਆ ਮੈਨੂੰ ਦੱਸੋ ਕਿਵੇਂ ਕਰਾਂ ਸਾਹ ਸਾਹ ਜਨ ਨੂੰ ਜੀਤੂ ਸਾਹ ਜਨ ਕਹੇ ਜਨਮ ਬਣਦਾ ਚਤਰ ਤੇ ਬਾਹਰ ਹੁੰਦਾ ਸਾਧਾ ਔਰ ਜਾਦੂ ਜਿਹਨੇ ਸਾਧਿਆ ਹੋਇਆ ਮਨ ਹੁਰਬਾਨੀ ਦੀ ਜਾਣਕਾਰੀ ਰੱਖਦਾ ਅਸਲ ਸਾਧ ਜਨ ਸਤਿਗੁਰੂ ਨੂੰ ਹੀ ਜਾਣਦਾ ਸਤਿਗੁਰੂ ਕਿਹਨੂੰ ਜਾਣਿਆ ਜਦ ਤੋਂ ਜਨਕਪੁਰੂ ਤੋਂ ਰਾਜਾ ਜਨਕ ਦਾ ਉਤਾਰ ਸਾਹ ਜਨ ਦੇ ਸਰਦਾਰ ਕਿਉਂਕਿ ਉਹਨਾਂ ਨੇ ਕੋਲ ਮੁਕਤ ਪਦਾਰਥ ਹੈਗਾ ਕਮਖਾਂ ਤਾਂ ਉਹਨਾਂ ਦੀ ਜਨ ਪਹਿਲਾਂ ਜਾ ਕੇ ਵੀ ਮੈਨੂੰ ਤਾਂ ਇਹ ਤੁਸੀਂ ਕੋਲ ਬੈਠ ਕੇ ਸਮਝੋ ਮੈਂ ਤੇਰੀ ਤੇ ਮਨੁੱਖੀ ਸਾਧੂ ਚੌਕੀ ਇਹ ਗੱਲ ਜਿਵੇਂ ਅਗਰ ਉਹਨੂੰ ਕੋਲ ਬੈਠ ਕੇ ਹੀ ਸਮਝੇ ਬੈਠ ਕੇ ਸਮਝ ਗਿਆ ਇਹ ਮਹਾਦਾਸ ਕੋਲ ਬੈਠ ਕੇ ਹੀ ਅੰਦਰ ਤੇ 12 ਸਾਲ ਚ ਸਮਝ ਆਉਂਦੀ ਸਾਰੀ ਗੱਲ ਸੰਗਤ ਕਰਕੇ ਇਹਨੂੰ ਗੁਰੂ ਰਾਮਦਾਸ ਸੰਗਤ ਬਿਨਾਂ ਗੱਲ ਸਮਝ ਆਉਂਦੀ ਹੋ ਨਹੀਂ ਉਹ ਕਹੇ ਸੀ ਸਾਜਣਾ ਦੀ ਸਰਦੀ ਪਰ ਵੀ ਨਹੀਂ ਜੱਟ ਇਹ ਕਰ ਬੈਠੇ ਦੀ ਸਮਝ ਚਾਉਣੀ ਹੈ ਬੰਦੇ ਸਾਰਾ ਦੇ ਤੇ ਰਾਜੇ ਜਾਓ ਫਿਰ ਤੂੰ ਸੱਚ ਜਿਹੜੀਆਂ ਨਹੀਂ ਛੱਡ ਦੋਗੇ ਤੁਸੀਂ ਐਨੇ ਛੋੜੇ ਦੋ ਗੱਲਾਂ ਦੀ ਪਹਿਲੀਆਂ ਇਹ ਤਾਂ ਤੁਹਾਡੇ ਆਪ ਬਾਣੀ ਬੜੇ ਤੇ ਤੁਸੀਂ ਆਪ ਇਹ ਰਾਜੇ ਕਰ ਸਕਦੇ ਹੋ ਸੱਜੇ ਬਿਮਾਰੀ ਤੋਂ ਬਿਹਰਬ ਉਹ ਸਹਿਪਤ ਦਾਖਲ ਹੋਣਾ ਕੋ ਫਿਰ ਡਾਕਟਰ ਦੀ ਕਸਟਡੀ ਜਾਣਾ ਪਊਗਾ ਜੇ ਉਹ ਗਲੂਕੋਸ लगना ਵੇ ਤਾਂ ਉਹ ਹਾਲਤ ਹੋਈ ਹੋਈ ਆ ਫਿਰ ਤਾਂ ਡਾਕਟਰ ਉਹਦਾ ਜਾਣ ਪਊਗਾ ਫੇਰ ਮੈਟ ਹੋਣਾ ਪਊਗਾ ਆਗਲਾ ਹੁਣ ਆਪਾਂ ਸਮਝਦੇ ਆਂ ਨੂੰ ਜਿਸ ਤੱਕ ਧਰਮ ਵਿੱਚ ਗੱਲ ਕਹੀ ਹੋਈ ਆ ਠੀਕ ਹੈ ਸਟੇਜ ਬਾਈ ਵੀ ਆ ਜਾਂਦਾ ਪਰ ਗੱਲ ਵੀ ਕਿੱਥੇ ਬੁਖਤੀ ਦਾ ਦੋਪਰ ਦਾ ਤਾਂ ਅਜਨਮਤ ਕਰਦਾ ਦੋਪਰ ਦਾ ਜਨਮਤ ਕਰਨ ਨਾਲ ਹੀ ਦੋਪਰ ਦਾ ਤਾਂ ਆਈਆ ਸਬੂਤੀ ਤਾਂ ਜਨਮ ਬਣਦਾ ਖੜਾ ਸੁਠਿਆ ਪਰ ਕਹਿੰਦੇ ਜਿਸ ਜਨ ਕੋ ਪ੍ਰਭ ਪਿਆ ਜਨ ਦਰਸ ਦੀ ਵੀ ਆਸ ਜੇ ਉਹ ਜਨ ਜਾਦਾ ਹੈ ਸ਼ਬਦ ਜਨ ਬਣ ਗਿਆ ਸਾਨੂੰ ਪੈ ਕਹਿੰਦਾ ਜਨ ਆ ਬਣ ਗਿਆ ਫੇਰ ਜੇ ਉਹ ਗਾਹ ਨਹੀਂ ਹੋਰ ਪਿਆਸ ਹੋਵੇ ਬਚਾਰੇ ਪਾਸ ਤੋਂ ਦੀ ਪ੍ਰਭ ਦੇ ਦਰਸ਼ਨ ਜੇ ਹੋਰ ਗਾਹਾਂ ਦੀ ਵੀ ਦੀ ਧੁਰਫੀ ਬਾਣੀ ਦੇ ਨਾਲ ਸੰਪਰਕ ਦੀ ਸੁਰ ਦੀ ਦਾ ਬੇੜ ਦੀ ਸਿਰ ਆਂਗਦਾ ਕੇ ਤਾਂ ਫਿਰ ਗੁਣ ਕੋ ਬਲੇਆਰੀ ਹੋ ਜਾਦਾ ਨਾਮ ਕੋ ਕੁਝ ਨਹੀਂ ਕਰਦਾ ਉਹ ਤਾਂ ਆਪ ਹੀ ਸਭ ਕੁਝ ਕਰਦਾ ਮਰਦਾ ਆਪ ਉਹ ਨਾ ਕੀਆ ਉਹਨੂੰ ਕੁਝ ਕਰਦੀ ਲੋੜ ਨਹੀਂ ਕੋ ਤਾਂ ਫਿਰ ਪਰਮੇਸ਼ਰ ਤੋਂ ਦਿੱਤਾ ਉਹਦਾ ਸਭ ਗੁਰੂਆਂ ਦਾ ਨਾ ਨਾ ਕਰ ਜੇ ਪਿਆਸ ਭੂ ਵੀ ਜਾ ਨਾ ਕੋਈ ਕੁਰਬਾਨ ਕਿਉਂਕਿ ਫੈਦਨ ਦੀ ਗੱਲ ਦੀ ਪਿਆਸ ਹੋ ਗਈ ਉਹ ਤੁਰਪੋਣ ਨਾ ਸਮਾ ਉਹ ਜਿਹੜਾ ਅਧੂਰਾ ਸੀ ਉਹ ਉਹਦੇ ਬਲ ਬਲ ਨਹੀਂ ਜਾਂਦਾ ਜੀ ਉਹਦਾ ਜੋ ਜਿਹੜਾ ਜੋ ਜਨਮਨ ਤੇ ਦੱਸਦਾ ਉਹਦੇ ਜੋ ਬਲ ਬਲ ਨਹੀਂ ਜਾਂਦਾ ਬਲ ਬਲ ਤੋਂ ਬਹਾਰ ਨਹੀਂ ਜਾ ਸਕਦਾ ਜਿਹੜਾ ਪੂਰਾ ਬਣਾਉਣਾ ਹੀ ਚਾਹੁੰਦਾ ਇੱਥੇ ਜਿਹੜਾ ਸਮਾਨ ਬੰਦ ਕੇ ਰੱਖਦੇ ਆ ਨਾ ਇੱਥੇ ਹੀ ਰਹਿਣਾ ਉਹ ਨਹੀਂ ਜਿਹੜਾ ਗਾਣਾ ਛੱਡੇ ਜਾਂਦੇ ਉਹ ਬਲ ਬਲ ਜਿਹਾ